ਚਲੋਕ ਮਹੱਲਾ ਪੰਜਵਾਂ ਚੇਤਾ ਇਤਾ ਚੇਤ ਸਾਹਿਬ ਸੱਚਾ ਸੋਤਣੀ ਨਾਨਕ ਸਤਗੁਰ ਸੇਵ ਚੜ ਬੋਹਿਤ ਪੌਜਲ ਪਾਰ ਪੋ ਚੇਤਾ ਕਈ ਦਾ ਚੇਤ ਜੇਦੀ ਚਾਹਣਾ ਜੇਤਣਾ ਚੇਤਨ ਹੁਰੂ ਚੇਤਨ ਹੋਣਾ ਚਾਹਣਾ ਅਸਰ ਦੇ ਚੇਤਨੂ ਅਚੇਤਨਾ ਜਾਣਵਾ ਨਹੀਂ ਜਾਂਦਾ ਅਚੇਤ ਸੁਤਪ ਹੈ ਚੇਤ ਜਾਗਦਾ ਜੇ ਤੂੰ ਜਾਣਣਾ ਚਾਹੁੰਦਾ ਜਾਣਨ ਦਾ ਨੋ ਚੇਤ ਤੇ ਤਾਂ ਹੀ ਤਾਂ ਚੇਤ ਚੇਤਨਾ ਚਾਹੁੰਨਾ ਤਾਂ ਚੇਤ ਪਾਈ ਜਾਣਣਾ ਚਾਹੁੰਨਾ ਜਾਣ ਲੈ ਜਿਹੜਾ ਸੱਚਾ ਸਾਹਿਬ ਹੈ ਉਹ ਹੈ ਜਿਹਦੇ ਕੋ ਧਰਨਾ ਨਾਮ ਦਾ ਸਾਰਾ ਹੀ ਖਜਾਨਾ ਉਹਦੇ ਕੋਲੇ ਹੈ ਰਾਸਤੇ 'ਚ ਕਿਸੇ ਕੋਲੇ ਨਹੀਂ ਐ ਕੋਈ ਹੋਰ ਰਾਜ ਨਹੀਂ ਬਿਠਾਲੇ ਹੋਏ ਬਾਬੇ ਤੂੰ ਇੰਨਾ ਕੁ ਲੈ ਕੇ ਬਹਿ ਜਾ ਤੂੰ ਇੰਨਾ ਕੁ ਲੈ ਕੇ ਬਹਿ ਜਾ ਤੂੰ ਇੰਨਾ ਕੁ ਲੈ ਕੇ ਬਹਿ ਜਾ ਹੁੰਦਾ ਉਹ ਤਾਂ ਨਾ ਉਹਦੇ ਮੂੰਹ 'ਚ ਹੁੰਦਾ ਐ ਜਿਹੜਾ ਬੋਲਣ ਵਾਲਾ ਨਾ ਉਹਦੇ ਕੋਲ ਉਹ ਨਹੀਂ ਹੁੰਦਾ ਜੇ ਨਾ ਮੂੰਹ 'ਚ ਵੱਦ ਨਹੀਂ ਹੁੰਦਾ ਉਹਦੇ ਕੋਲ ਇਹ ਭਲੇਖਾ ਸਾਨੂੰ ਸਾਡੇ ਕੋਲ ਵੱਧਾ ਐ ਵਾ ਨਾਲ ਦੇ ਨਾਲ ਹੀ ਆਉਂਦੀ ਆ ਤਾਂ ਡੋਰ ਨਿਕਲ ਕੇ ਬਾਹਲਾ ਚਾਹ ਹੋਈ ਹੈ ਤਣਾ ਦੇ ਕੋਲ ਹੀ ਆ ਠੀਕ ਹੈ ਜੀ ਕੀ ਜੇ ਚੇਤਨ ਹੋਣਾ ਚਾਹਨਾ ਹੈ ਤੂੰ ਆਪਣੇ ਮੂਲ ਨੂੰ ਚੇਤ ਹੈ ਜੀ ਜੇ ਜਾਗਣਾ ਚਾਹਨਾ ਆਪਣੇ ਉਹਦੇ ਨਾਲ ਜੁੜ ਗੂੜ ਨਾਲ ਜੁੜ ਠੀਕ ਹੈ ਜੀ ਮੂਲ ਕੋਲ ਪਿਆਨ ਮੂਲ ਦੇ ਕੋਲ ਤਾਂ ਇੱਕ ਭੋਰੀ ਹੈ ਦਰਵਾਜ਼ਾ ਹੈ ਉਹ ਵੇ ਜਿਹੜਾ ਵੇਡ ਖਜ਼ਾਨਾ ਹੈ ਉਹ ਦਰਵਾਜੇ ਇੱਥੇ ਹੀ ਉਹ ਡੋਰੀਓ ਆਉਂਦੀ ਹੈ ਇੱਥੇ ਦੀ ਬਸ ਗੱਲੇ ਆਉਂਦੀ ਹੈ ਇਹ ਮਾਨ ਕੋਲ ਕੁਝ ਵੀ ਨਹੀਂ ਹੈਗਾ ਜਿੱਤ ਕੋਲ ਆਉਂਦੀ ਹੈ ਜਿੱਦ ਦੀ ਛੱਡਦਾ ਉਹਦੀ ਗਾਈ ਜਾਂਦੀ ਹੈ ਠੀਕ ਹੈ ਇਹ ਉਹਦੇ ਹੁਕਮ ਇਹ ਹੁਕਮ ਹੀ ਮੰਨਦਾ ਜੇ ਹੁਕਮ ਹੀ ਮੰਨਦਾ ਹੁਕਮ ਨੇ ਬਣਾ ਦੰਦਾ ਵੀ ਕੱਖ ਲਏ ਹੈ ਯਾਦੋ ਫੋਲੋ ਸਟਾਪ ਲਾਉਂਦਾ ਹੈ ਇਹ ਤਾਂ ਪਹਿਲਾਂ ਹੀ ਠੀਕ ਹੈ ਜੀ ਨਾਨਕ ਸਤਗੁਰ ਸੇਵ ਚੜ ਬੋਹਿਥ ਪੌਜਲ ਪਾਰ ਪਰੋ ਨਾਨਕਾ ਸਾਧਗੁਰ ਸੇਵ ਹਾਂਜੀ ਸਤਗੁਰ ਸੇਵ ਆਪੁਰ ਦੀ ਸੇਵਾ ਕਰ ਦੀ ਸੇਵਾ ਚੜਨਾ ਅਧੂਰ ਦੀ ਸੇਵਾ ਵਿੱਚ ਬਹੁਤ ਹੈ ਉਹੀ ਬਹੁਤ ਹੈ ਚੱਲ ਭਗ ਜਲਣਾ ਭਗ ਜਲ ਪਾਰ ਪਉ ਕਾਦੁਰ ਦੀ ਸੇਵਾ ਕਰਦਾ ਰਹੇ ਭਗ ਜਲ ਤੇ ਪਾਰੇ ਖੜਾ ਦਬੋਏ ਸਕਦਾ ਕੋਈ ਛਾਵਤ ਵਿਚਾਰ ਚੋਂ ਵੀ ਇਹਨੂੰ ਕੋਈ ਡਬੋਲ ਸਕਦਾ ਦੇਖੋ ਚਾਰ ਪਦਾਰਥਾਂ ਨਹੀਂ ਮਿਲਦੇ ਛਾਵਤ ਵਿਚਾਰ ਚੋਂ ਪਰ ਦੋ ਪਦਾਰਥ ਆਲਾ ਬਲੀ ਤੋਂ ਮੁਕਤ ਹੈ ਉਹ ਰਬੋ ਕਰਵੇਂਗਾ ਇਹ ਨੁਕਤਾ ਹੈ ਇਹ ਸ਼ਬਦ ਵਿਚਾਰ ਵੀ ਕਰਦਾ ਰਹੇ ਬਾਹਨ ਕਬਰ ਆਵੇ ਨਾ ਸਰੀਰ ਛੱਡਣ ਵੇਲੇ ਡੋਲੇ ਨਾ ਇਹ ਨੂੰ ਕੋਈ ਦੁਨੀਆ ਦੀ ਤਾਕਤ ਭਵ ਚਲ ਰੱਖ ਸਕਦੀ ਇਹਦੇ ਪ੍ਰੋਫੈਸ ਤੇ ਖੜੀ ਹੈਗਾ ਪ੍ਰੋਸਾ ਟੁੱਟ ਜਾਂਦਾ ਉਹ ਦਰ ਜਾਂਦਾ ਦਵਾ ਹੁਣ ਟੁੱਲਣ ਤੇ ਰੱਖੋ ਪ੍ਰਭੂ ਤਾਂ ਹੀ ਕਿ ਇਹ ਡੋਲੇ ਨਾ ਸੱਚਖੜ ਚੱਲ ਜਾਂਦਾ ਠੀਕ ਹੈ ਦੋ ਪਦਾਰਥ ਲੈ ਕੇ ਜਾਂਦਾ ਪਰ ਐ ਮੁਕਤ ਮੁਕਤਬ ਪਰ ਇਹ ਵੀ ਗਿਆਨੀ ਤਿਆਗਾ ਤਿਆਗੜੀਆਂ ਲੋੜ ਕੋਈ ਨਹੀਂ ਹੈ ਉਹ ਜਿਹਦੀ ਜ਼ਿੰਮੇਵਾਰੀ ਨਹੀਂ ਘਰ ਦੇ ਵਿੱਚ ਖਾਣ ਪੀਣ ਨੂੰ ਖੁੱਲਾ ਹੈ ਉਹਨੇ ਪੰਗਾ ਜ਼ਰੂਰ ਲੈਣਾ ਜ਼ਿੰਮੇਵਾਰੀ ਦਾ ਠੀਕ ਹੈ ਜਿੰਮੇਵਾਰੀ ਕੋਈ ਸਾਰੇ ਘਰ ਦਾ ਹਲਕਾ ਹੈ ਕਾਹਿਆਂ ਜ਼ੁਲਤਾ ਨੇ ਉਹਨੇ ਜਿੰਮੇਵਾਰੀ ਲੈ ਕੇ ਜਾਦਾ ਪੱਗਾਂ ਲੈਣੇ ਇਹ ਕਹੇ ਦੀ ਸੇਵ ਦਾ ਮਤਲਬ ਹੈਗਾ ਵੀ ਸ਼ਬਦ ਦੀ ਵਿਚਾਰ ਹੈ ਜੀ ਦੇਖੋ ਸਤਗੁਰ ਦੀ ਸੇਵਾ ਨੂੰ ਕਹਿੰਦੇ ਕਿਉਂਦੇ ਸ਼ਬਦ ਬਾਝੋਂ ਕਿਉਂ ਸਤਗੁਰ ਦਾ ਖੁਰਾਕ ਹੈ ਸਤਗੁਰ ਦੀ ਠੀਕ ਹੈ ਗੁਰ ਸੇਵਾ ਸ਼ਬਦ ਵਿਚਾਰ ਪ੍ਰਗਿਆਨੀ ਭੋਜਨ ਗਿਆਨ ਕਵਲ ਵਿਚਾਰ ਚੋ ਬਿਆਨ ਮਿਲਦਾ ਮਨ ਦੇ ਮਤਲਬ ਦਾ ਨਹੀਂ ਸਤਿਗੁਰ ਦਾ ਹੀ ਖਰਾਕ ਹੈ ਉਹ ਇਸੇ ਕਰਕੇ ਸੇਵ ਹੈ ਇੱਕ ਗੱਲ ਦੂਜੀ ਗੱਲ ਉਹਦੇ ਹੁਕਮ ਚੱਲਦਾ ਹੋ ਸੇਵ ਹੈ ਲੋਕ ਅੱਲਾਹ ਤੋਂ ਸਤਿਗੁਰ ਦੀ ਸੇਵੇ ਸਮਝ ਨਹੀਂ ਆਈ ਤਾਂ ਫਿਰ ਦੱਲੇ ਦੀ ਸਤਿਗੁਰ ਕਹਿੰਦਾ ਆਂ ਰਾਮਈ ਗਰਮ ਪਾਣੀ ਚਾਹੀਦਾ ਸਰਦੀਆਂ ਦੇ ਵਿੱਚ ਇਹ ਗਰਮੀਆਂ 'ਚ ਠੰਡਾ ਚਾਹੀਦਾ ਇਆ ਕੋਈ ਹੋਰੋ ਦੀ ਬੁਢੀ ਚਾਪੀ ਕਰਦੀ ਚਾਹੀਦੀ ਹੈ ਉਹ ਥੱਕਦਾ ਦੇ ਤੌੜੇ ਹੈ ਇਦੀ ਭੋਜਨ ਦੀ ਕਾਟ ਹੈ ਉਹਦੇ ਵਿੱਚ ਗਿਆਨ ਭੋਜਨ ਦੀ ਕਾਟ ਹੈ ਉਹਦੇ ਗਿਆਨ ਭੋਜਨ ਦੀ ਕਾਟ ਪੂਰੀ ਕਰਦੀ ਜਿੰਦੀ ਹੈ ਤੇ ਹੋ ਸੇਵ ਉਹ ਸ਼ਬਦ ਵਿਚਾਰ ਤੋਂ ਹੋ ਸਕਦੀ ਹੈ ਉਹਦੀ ਰਜਾ ਵਿੱਚ ਰਹਿ ਕੇ ਹੋ ਸਕਦੀ ਉਹਦੀ ਰਜਾ ਵਿੱਚ ਰਹਿਣਾ ਉਹਨੂੰ ਖੁਸ਼ ਰੱਖਣਾ ਉਹਦੀ ਰਜਾ ਜਰਣ ਉਹਨੂੰ ਖੁਦ ਰੱਖਣਾ ਪਹਿਲੀ ਗੱਲ ਹੈ ਛਬਦ ਵਿਚਾਰ ਚੋ ਜੇ ਇਹਨੂੰ ਘੱਟ ਵੱਧ ਵੀ ਮਿਲੇ ਤਾਂ ਵੀ ਕੋਈ ਗੱਲ ਨਹੀਂ ਜਿੱਦੀ ਕਹਿੰਦੀ ਬੁੱਧੀ ਹੈ ਮਿਲਣਾ ਤੌਦਾਂ ਹੀ ਹੈ ਵੱਡੀ ਗੱਲ ਉਹਦੀ ਰਜਾ ਜਰਣ ਮਹਲਾ ਪੰਜਵਾਂ ਵਾਉ ਸੰਦੇ ਕੱਪੜੇ ਪਹਿਰੇ ਅਜਿਹੇ ਹਵਾ ਦੇ ਕੱਪੜੇ ਪਾ ਲੈਣਾ ਕੱਪੜੇ ਦਾ ਆਗਾਜ਼ ਦੇ ਪਾਉਣੇ ਅਸੀਂ ਤਾਂ ਕੱਪੜੇ ਪਾ ਲੈ ਇਹਦੇ ਬਹੁਤ ਜੋ ਸੁਣਿਆ ਜਿਹੜਾ ਮੰਨ ਲਿਆ ਮਤ ਬਣ ਗਈ ਉਹ ਕੱਪੜੇ ਪਾ ਲੈ ਪੂਰਾ ਗਿਆ ਹੋਇਆ ਜੋ ਗਿਆ ਸੀ ਉਹਦਾ ਗਿਆ ਜਿਹੜਾ ਤਾਨ ਕਰ ਲਿਆ ਬਹੁਤ ਸਦੇ ਕੱਪੜੇ ਪਾ ਲੈ ਗਰਬ ਗਵਾਰੇ ਸੀ ਉਹਦੇ ਜੇ ਹੋਰ ਰਤ ਕੀ ਸੀ ਉਹ ਜਿਹੜੇ ਆਈਡੀ ਸੰਤਾ ਨੇ ਖੇ ਜਮਗੀ ਉਹ ਜਿਹੜੇ ਲਉਦੇ ਤੇ ਹੋ ਬਹੁਤ ਸਨੇ ਕੱਪੜਿਆਂ ਨੇ ਖੇ ਜਮਗੀ ਚਾਰ ਚਾਰ ਉਪਰ ਉਹਨਾਂ ਨੇ ਪੈਗੀ ਜੰਦਾਲ بس ਕੱਲੇ ਲੈ ਦੇ ਜੰਦਾਲ ਲੋਣੀ ਪੈਣੀ ਆ ਬਹੁਤ ਸਦੇ ਕੱਪੜੇ ਪਾਇਨੇ ਸਾਰਿਆਂ ਨੇ ਜਿੰਨੀਆਂ ਮੁੱਤਾਂ ਨੇ ਬਹੁਤ ਸਦੇ ਕੱਪੜੇ ਨੇ ਸਾਰਿਆਂ ਦੇ ਉਹ ਗੱਲ ਬਗਵਾ ਜਿਨ੍ਹਾਂ ਰਹਿ ਰਾ ਅਗਿਆਦੇ ਬੂਰਖੰਦ ਕੋਹਰਾ ਨੇ ਪਾਏ ਹੋਏ ਨੇ ਜੋ ਸਾਖੀਆਂ ਸੁਣਨੀਆਂ ਜਿਉਂਦੀਆਂ ਕਿਉ ਮੰਨ ਲੀਆਂ ਬੋਸੰਦੇ ਕੱਪੜੇ ਸਾਰਾ ਮਾਂ ਭਾਰਤ ਬੰਦ ਕੇ ਬਹਿ ਗਏ ਸਾਰੇ ਸਮਤ ਸ਼ਾਸਤਰ ਮੰਨ ਕੇ ਬਹਿ ਕੱਪੜੇ ਉਹ ਕਹਿਦਾ ਦਿੱਤਾ ਕੁਝ ਹੋਰ ਦੱਸੀਏ ਕਿ ਮੈਂ ਬੋਸੰਦੇ ਕੱਪੜੇ ਉਹ ਬੂ ਕਾ ਗਿਆ ਬੋਸੰਦਾ ਠੀਕ ਹੈ ਬੁਲਾਇਆ ਬੋਲੇ ਦੀ ਹੈ ਉਹ ਬੋਸੰਦੇ ਕੱਪੜੇ ਨੇ ਭਾਈ ਗਰਦਾਸ ਦੀਆਂ 12 ਬੋਸ ਤੇ ਕੱਪੜੇ ਨੇ ਪਹਿਨੇ ਤੌਣ ਨੇ ਗਰਬ ਗੁਵਾਰ ਜਿੰਨੇ ਪਹਿਨ ਲੇ ਆਦ ਕਲ ਲੀਆਂ ਚਾਹੀ ਤਾਂ ਅਗਿਆਨੀ ਬਣ ਗਰਬ ਹੁੰਦਾ ਠੀਕ ਹੈ ਜੀ ਕਾਲੀ ਹੋ ਗਏ ਅਗਿਆਨੀ ਬਣਾਸਤੇ ਗੁਵਾਰ ਹੁੰਦਾ ਨੇਰਾ ਗਰਬ ਹੁੰਦਾ ਉਕਾਰ ਜੋ ਜਿੰਨਾ ਫਰਾਬ ਦੁਨੀਆਂ ਨਾ ਤੂੰ ਜੋ ਭਾਈ ਸਤੋਕ ਸਿੰਘ ਨੇ ਲਿਖਿਆ ਜੋ ਗੁਰਪ੍ਰਾਸਾ ਪਾਸਾਈ ਛੇਵੀਂ ਨੇ ਲਿਖਿਆ ਭਾਈ ਗੋਬਰਾ ਦੀਆਂ 12 ਦੇ ਨਾਂ ਤੇ ਲਿਖੀਆਂ ਨੇ ਉਹਨੇ ਨਹੀਂ ਲਿਖੀਆਂ ਨੇ ਉਹਦਾ ਨਾਮ ਵਰਤ ਕੇ ਬਾਕੀ ਲੱਖਾਂ ਕਿਤਾਬਾਂ ਇਤਿਹਾਸੀਆਂ ਹੀ ਦੀਵਸਤੀ ਵਾਲਿਆਂ ਦੀਆਂ ਇਹ ਬੌਸੰਦੇ ਕੱਪੜੇ ਨੇ ਚੋਲ ਡਰੇ ਚਰਕ ਪਰ ਮਤੋਂ ਅਲੱਗ ਬੌਸੰਦੇ ਕੱਪੜੇ ਨੇ ਗਵਾਰ ਪੈਦਾ ਕਰਤਾ ਸਿੱਖੀ ਇਹ ਨਾਲ ਦੀ ਮਦਦ ਨਾਲ ਸਿੱਖੀ ਲੱਭ ਕੇ ਦਿਖਾਉਣੇ ਕਿੰਨਾ ਚਿਰ ਇਹਨਾਂ ਚੱਕ ਇੱਕ ਇੱਕ ਪਾਸੇ ਨਹੀਂ ਹਟਾ ਦਿੰਦੇ ਸਿੱਧੀ ਗੁਰੂ ਨਾਲ ਸੰਪਰਕ ਕਰਕੇ ਸਿੱਧਾ ਗੁਰੂ ਨਾਲ ਜੁੜ ਕੇ ਗੁਰਬਾਣੀ ਨਹੀਂ ਖੋਜਦੇ ਉਹਨਾਂ ਚ ਰਾਹ ਪਤਾ ਨਹੀਂ ਲੱਗਣਾ ਨਾਲ ਨਾਲ ਜਣੇ ਇਹਦੇ ਜੋ ਕੁਝ ਵੀ ਨਾਲ ਜਾਣ ਵਾਲਾ ਬਹੁਤ ਸੰਨੇ ਕਪੜਿਆਂ ਚੋਂ ਕਿਉਂਕਿ ਛਾਚੇ ਤੇ ਬਬਨਾ ਪਿਆ ਬਬਨਾ ਦਾ ਭਾਇਆ ਭਾਇਆ ਦੇ ਕੱਪੜੇ ਪਾ ਲੇ ਉਹ ਤੇ ਜਲ ਹੋਏ ਜਲ ਤੇ ਤਿਰਪ ਬਨਾ ਸਾਜਿਆ ਉਧਰ ਜਾ ਦਿੱਤਾ ਨਾ ਦੀ ਰਾਜ ਰੱਖੀ ਆ ਉਥੇ ਕੀ ਦਿੱਤਾ ਅੰਬਰ ਦੇ ਤਵਾਰੀਏ ਤੇ ਬਉ ਨਹੀਂ ਦਿੱਤੀ ਉਥੇ ਅੰਬਰ ਦਿੱਤਾ ਉਹ ਲੈ ਸੀ ਅੰਬਰ ਦੇ ਲੈ ਲਈ ਬਉ ਭਾਇਆ ਤਾਰੀ ਹੋ ਗਏ ਅਕਲ ਬੋੜੇ ਹੋ ਗਏ ਹਾਂ ਜੀ ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਛਾਰ ਇਹ ਜਲ ਵਾਲੀ ਚੀਜ਼ ਹੈ ਬਲ ਵਾਲੀ ਚੀਜ਼ ਹੈ ਛਾਰ ਹੋਣ ਵਾਲੀ ਚੀਜ਼ ਹੈ ਸੋਹਣ ਵਾਲੀ ਚੀਜ਼ ਹੈ ਸਭ ਠੀਕ ਹੈ ਜੀ ਪੌੜੀ ਤੇਈ ਉੱਬਰੇ ਸੱਚ ਦੇ ਗਿਆਨ ਨੇ ਜਿਹੜੇ ਰੱਖੇ ਨੇ ਉਹੀ ਜਿਉਂਦੇ ਰਹੇ ਨੇ ਸੰਸਾਰ ਚ ਸੱਚ ਦੇ ਗਿਆਨ ਨੇ ਹੱਥੋਂ ਗਿਆਨ ਨਾਲ ਜਿਹੜੇ ਜੁੜ ਗਏ ਉਹ ਬਚ ਗਏ ਸੰਸਾਰ ਚ ਔਰ ਕੋਈ ਨੀ ਬਚਿਆ ਮੂੰਢ ਇੱਠੇ ਤਿੰਕੇ ਜੀਵੀ ਹਰ ਅੰਮ੍ਰਿਤ ਚੱਖੇ ਜਿਨ੍ਹਾਂ ਨੇ ਅੰਮ੍ਰਿਤ ਚੱਖ ਲਿਆ ਉਹਨਾਂ ਦੇ ਤਾਂ ਮੂੰਢ ਇੱਠੇ ਜੇ ਦੇਖ ਲਿਏ ਨਾ ਉਮਰ ਤੇ ਛੱਡ ਰਿਆ ਇਹਨੂੰ ਉਮਰ ਦਾ ਅੰਮ੍ਰਿਤ ਨਾਮ ਅਮਰ ਦੇ ਛਗਦੇ ਦੇਖੇ ਤੇ ਵੀ ਜਨਮ ਬੰਦ ਕਟਿਆ ਜਾਂਦਾ ਜਿਹੜੇ ਅਮਰ ਦੇ ਨੇ ਨਾ ਅਮਰ ਦੇ ਛਗਦੇ ਨੇ ਸੰਤ ਦੇ ਵਿੱਚ ਬੈਠ ਕੇ ਗੁਰੂ ਕੀ ਦੇ ਵਿੱਚ ਆ ਗੁਰੂ ਸਮਝਾ ਰਿਹਾ ਉਹ ਸਮਝ ਰਹੇ ਨੇ ਉਹਨਾਂ ਦੇ ਤਾਂ ਮੂੰਹ ਤੇ ਕਈ ਤਰ ਜਰਦੇ ਨੇ ਉਹ ਜੋ ਉਹਨਾਂ ਦੇ ਮੂੰਹ ਚ ਗੱਲ ਪੈਂਦੀ ਆ ਉਹ ਵੀ ਸਮਝ ਲੈਂਦੇ ਨੇ ਉਹ ਵੀ ਤਾਂ ਸੁਣ ਲੈਂਦੇ ਨੇ ਬੂੜੇ ਚੇਤਨ ਕੇ ਜੀਵੀਏ ਇਹ ਅਮਰਤ ਚੱਖੇ ਜਿਹਨਾਂ ਨੇ ਅਮਰ ਚੱਖ ਲਿਆ ਉਹਨਾਂ ਦੇਖ ਲਈਏ ਨਾ ਜਾਂ ਚੱਕਦੇ ਹੁੰਦੇ ਨੇ ਜਾਂ ਚੱਕਦੇ ਹੁੰਦੇ ਨੇ ਜਾਂ ਜੋ ਉਹ ਲੈਣਾ ਜੀਵੀਏ ਹਾਰ ਅਮਰਤ ਚੱਖੇ ਕਾਮ ਕ੍ਰੋਧ ਲੋਭ ਮੋਹ ਸੰਗੀ ਸਾਧਾ ਪਖੇ ਕਾਮ ਕ੍ਰੋਧ ਲੋਭ ਮੋਹ ਸੱਤੀ ਕਾਮ ਕ੍ਰੋਧ ਮਦ ਲੋਭੋ ਸਾਦਾ ਉਹਨਾਂ ਨੇ ਜ਼ਿਆਦਾ ਨਹੀਂ ਸੰਤਤ ਕਰਕੇ ਖਾਏ ਲੈ ਸਾਰੇ ਕਾਮ ਕ੍ਰੋਧ ਲੋਭੋ ਸਾਰੇ ਕਰਤੇ ਆਪਣੇ ਅੰਦਰੋਂ ਖਾ ਕੇ ਖਾ ਕੇ ਹਜਮ ਕਰ ਲੈ ਹੰਝ ਕਿਰਪਾ ਪ੍ਰਭ ਆਪਣੀ ਹਰਾਬ ਪਰਖੇ ਕਿਰਪਾ ਕਰਵ ਕਦੀ ਪ੍ਰਭ ਆਪਣੀ ਹਰਾਬ ਪਰਖੇ ਪ੍ਰਭ ਨੇ ਕਿਰਪਾ ਕਰ ਲਈ ਆਪੇ ਪਰਖ ਲੈ परखे तागन जब भी गए अयभी करके कदे बिचे नहीं रह गए परख भी ले वे के हजम करके बाहर भी निकल गए इन आदे कृपा करी प्रभु ने आप आप परख ले हां भी ए, खरे हो गए इना आदे काम क्रोध लोभ है नी, ठीक है जी नानक चलत न जप्नी को सके ना लखे ਨਾਨਕ ਜਲਤਨ ਜਾਪਣੇ ਇਹੋ ਚਲ ਕੇ ਦਿਖਾਇਆ ਪ੍ਰਮੇਸ਼ਰ ਨੇ ਕਿਵੇਂ ਪਰਖਦਾ ਕਿਵੇਂ ਉਹਨਾਂ ਨੂੰ ਪੱਕ ਲੈਂਦ ਕਿਵੇਂ ਖਾ ਜਾਂਦੇ ਨੇ ਇਹ ਚਲਦਾ ਨੂੰ ਸਮਝ ਆ ਰਹੀ ਇਹ ਗੱਲ ਕਿਆ ਤਨਾਂ ਜਾ ਪੜੀ ਨਾ ਲੱਕੇ ਕਿਹੜਾ ਇਹਨੂੰ ਦੇਖੂ ਕਿਹੜਾ ਅੱਖਾਂ ਨਾਲ ਦਿਖਾਉਣੀਆਂ ਗੱਲਾਂ ਨਹੀਂ ਇਹ ਵਾਲਾ ਵਰਤਾਰ ਠੀਕ ਹੈ ਇਹ ਵਰਤਾਰ ਵਰਤਨਾਲਾ ਦਿਖਾਣੀਆਂ ਗੱਲਾਂ ਨਹੀਂ ਹੈ ਇਹ ਕਿਹੜਾ ਕੰਮ ਕਰੋ ਤੇ ਮੂੰਹ ਥਾਲੀ ਚਪਾ ਕੇ ਖਾ ਠੀਕ